ਜੋ ਨਾਮਧਾਰੀ ਸਮਾਜ ਸੰਗੀਤ ਦਾ ਪ੍ਰਚਾਰ ਹੈ ਉਹ ਸਭ ਸਤਿਗੁਰੂ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਨਾਲ ਹੀ ਅੱਜ ਪੂਰੇ ਸੰਗੀਤ ਜਗਤ ਵਿੱਚ ਉਹਨਾਂ ਦਾ ਬਹੁਤ ਉੱਚੇ ਸਾਨ ਤੇ ਨਾਮ ਹੈਗਾ ਔਰ ਇਹਨਾਂ ਬੱਚਿਆਂ ਕੋਲ ਵੀ ਤੁਸੀਂ ਪਹਿਲੇ ਤਾਲ ਤਮਾਰ ਚ ਸੁਣਿਆ ਇਹਨਾਂ ਛੋਟੇ ਬੱਚੇ ਤੋਂ ਤਾਲ ਤਮਾਰ ਚ ਗਾਉਣਾ ਬਹੁਤ ਮੁਸ਼ਕਲ ਚੀਜ਼ ਹੈ ਫਿਰ ਇਹਨਾਂ ਨੇ ਨਾ ਕੀ ਕੰਨਾਂ ਨਾਲ ਬਾਕੀ ਹੋਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਅੱਜ ਦਵਿੰਦਰ ਪ੍ਰਤਾਪ ਸਿੰਘ ਜੀ ਔਰ ਜੀ ਮਹਿੰਦਰ ਪਟਾਵ ਸਿੰਘ ਜੀ ਆਏ ਨੇ ਇਹਨਾਂ ਨੂੰ ਮੈਂ 25-30 ਸਾਲ ਪਹਿਲਾਂ ਸਤਿਗੁਰੂ ਜੀ ਦੇ ਹਜ਼ੂਰੀ ਵਿੱਚ ਦਿੱਲੀ ਵਿੱਚ ਇੱਕ ਹਫਤਾ ਇੱਕ ਲੜੀਵਾਰ ਪ੍ਰੋਗਰਾਮ ਹੋਇਆ ਜਿੱਚ ਸਿੰਘ ਮੰਦੂ ਆਏ ਪੰਡਿਤ ਕਿਸ਼ਨ ਮਾਰਾ ਹੈ ਫਿਰ ਇੱਕ ਦਿਨ ਇਹਨਾਂ ਨੂੰ ਬੁਲਾ ਕੇ ਸੁਣਿਆ ਗਿਆ ਔਰ ਸਤਿਗੁਰੂ ਜੀ ਦੀ ਬਹੁਤ ਇਹਨਾਂ ਦੇ ಅಪਾਰ ਕਿਰਪਾ ਹੈ ਬਹੁਤ ਇਹਨਾਂ ਨੂੰ ਤੇ ਖੁਸ਼ੀਆਂ ਹਨ ਪਿਛਲੇ 7-8 ਸਾਲ ਪਹਿਲਾਂ ਜਦੋਂ ਸਤਿਗੁਰੂ ਜੀ ਕੈਨੇਡਾ ਚ ਗਏ ਸੀ ਉਦੋਂ ਵੀ ਇਹਨਾਂ ਨੂੰ ਬਹੁਤ ਸਪੈਸ਼ਲ ਉਹਨਾਂ ਨੇ ਸਤਿਗੁਰੂ ਜੀ ਨੇ ਫੋਨ ਕਰਕੇ ਬੁਲਾਇਆ ਤੈਨਾਂ ਤੋਂ ਕੀਰਤਨ ਸੁਣਿਆ ਕਿਉਂਕਿ ਅੱਜ ਦੇ ਸਿੱਖ ਸਮਾਜ ਦੇ ਵਿੱਚ ਸਾਡੇ ਰਾਗੀ ਜਿਹੜਾ ਪ੍ਰਾਚੀਨ ਸਾਡਾ ਕਿਰਤਨ ਸੀ ਜਾਂ ਅੱਜ ਕਿੰਨੂੰ ਸੁਣਾਉਣ ਇੱਕ ਬਹੁਤ ਵੱਡਾ ਸਵਾਲ ਉੱਠ ਰਿਹਾ ਕਿ ਕਿਸੇ ਵੀ ਸਿੱਖ ਸਮਾਜ ਦੇ ਵਿੱਚ ਕੋਈ ਐਸੀ ਸੰਭਰਦਾ ਨਹੀਂ ਹੈ ਜਿਹੜਾ ਕਿ ਇਸ ਕਲਾਸੀਕਲ ਕੀਰਤਨ ਨੂੰ ਉੱਪਰ ਲਿਆਵੇ ਔਰ ਉਹਨੂੰ ਸੁਣਨ ਵਾਸਤੇ ਵੀ ਕੋਈ ਨਾ ਕੋਹ ਉਹ ਜੋ ਸਰੋਤਾ ਜਾਂ ਉਹ ਜੋ ਕਦਰਦਾਰ ਹੋਣ ਪਰ ਇਹ ਸਾ ਗੁਰੂ ਜੀ ਜੀ ਦੀ ਕਿਰਪਾ ਹੈ ਹਰ ਕੀਰਤਨ ਵਾਲਾ ਹਰ ਕਲਾਕਾਰ ਉਹ ਦੁਨੀਆ ਦਾ ਕੋਈ ਐਸਾ ਇਨਸਾਨ ਨਹੀਂ ਕਲਾਕਾਰ ਤੋਂ ਇਲਾਵਾ ਜਿਹੜਾ ਉੱਥੇ ਆ ਕੇ ਹਾਜ਼ਰੀ ਨਾ ਦੇਵੇ ਇਹ ਸਭ ਉਹਨਾਂ ਨੂੰ ਅਸ਼ੀਰਵਾਦ ਜਦ ਤੱਕ ਨਾ ਮਿਲੇ ਪਿਛਲੇ ਦਿਨਾਂ ਵਿੱਚ ਪੰਨ ਜਸਰਾਜ ਜੀ ਜਲੰਧਰ ਗਏ ਸੀ ਸਾਹਿਬ ਨੂੰ ਦਰਸ਼ਨ ਹੋ ਕਰਕੇ ਜਾਵਾ ਤਾਂ ਪੰਨ ਜੀ ਆਏ ਉਹਨਾਂ ਨੇ ਉਸ ਸਥਾਨ ਦੇਖ ਕੇ ਆਖਿਆ ਕਿ ਮੇਰਾ ਜੀ ਕਰਤਾ ਮੈਂ ਇੱਥੇ ਹੀ ਤੁਰਾਬ ਜੀ ਚਰਨਾ ਚ ਰਵਾਂ ਕਿ ਇੰਨੀ ਅੱਛੀ ਜਗ੍ਹਾ ਇੰਨੀ ਸ਼ਾਂਤੀ ਇਨਾ ਪੀਸਫੁਲ ਹੋਰ ਇਹ ਸਥਾਨ ਦੇ ਉੱਤੇ ਆਪ ਜੀ ਨੇ ਸੰਗੀਤ ਦੀਆਂ ਜਿੱਥੋਂ ਕਿ ਦੁਨੀਆ ਚ ਸਾਰਿਆਂ ਇੱਕ ਉਸਮ ਜ਼ਿਕਰ ਨਾ ਨਿਕਲਦੀਆਂ ਨੇ ਸਭ ਆਪ ਜੀ ਦੀ ਕਿਰਪਾ ਹੈ ਮੈਂ ਉਹਨਾਂ ਨੂੰ ਇਹਨਾਂ ਦੇ ਪਿਤਾ ਜੀ ਨੂੰ ਵੀ ਜਾਨਣਾ ਬਹੁਤ ਅੱਛੇ ਤਰ੍ਹਾਂ ਭਾਈ ਪ੍ਰਤਾਪ ਸਿੰਘ ਜੀ ਉਹ ਵੀ ਸਤਿਗੁਰੂ ਜੀ ਕੋਲ ਬਹੁਤ ਵਾਰੀ ਹਾਜ਼ਰੀ ਦੇ ਚੁੱਕੇ ਹਨ ਉਹ ਪੁਰਾਣੇ ਬਜ਼ੁਰਗਾਂ ਚੋਂ ਕੀਰਤਨ ਵਾਲੇ ਚ ਬਹੁਤ ਉਹਨਾਂ ਦਾ ਉੱਚਾ ਸਥਾਨ ਹੈ ਬਹੁਤ ਅੱਛਾ ਨਾਮ ਹੈ ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਅਰਜ਼ੀ ਕਰਾਂਗਾ ਕਿ ਸਟੇਜ ਤੇ ਆਣ